ਭਗਤ ਜੀ ਨਾਲ ਕੀ ਵਰਤਨ ਨਾਮ ਸੰਤ ਜੀ ਨਾਲ ਕੇ ਮਨ ਵਿਚਰਾਮ ਭਗਤ ਜੀ ਨਾਲ ਨਾ ਵਰਤਨ ਨਾਮੇ ਵਰਤਨ ਪੈਦਾ ਹੋਈ ਦੀ ਗੱਲ ਹੋਈ ਸੀ ਉਹਦਾ ਨਾਮ ਵਰਤ ਕੇ ਸੰਤ ਕਰ ਲੋ ਜਦੋਂ ਮੈਂ ਕੋਈ ਚੀਜ਼ ਪਰੇ ਸੰਭਾਲ ਕੇ ਉੱਥੇ ਉਹ ਕੋਈ ਖੌਤ ਜਿਨਾ ਮੱਛਰਾਂ ਮੱਛਰ ਤੇ ਆਪਾਂ ਲਾਤੀ ਇਹ ਛਿੜਕਦਾ ਕੋਈ ਸਪਰੇਅ ਕਰਦਾ ਕੋਲ ਜਿੱਦੜਾ ਆਕਰਖੀ ਸੀ ਉਹ ਤੇ ਬਰਤਨਾ ਕੀ ਸੀ ਇਸੇ ਖਲਾਫ ਹਰ ਤਰ੍ਹਾਂ ਹਰ ਤਰ੍ਹਾਂ ਉਪਰ ਤੋਂ ਚੀਜ਼ ਦਾ ਸਾਨੂੰ ਨੁਕਸਾਨ ਹੋਊਗਾ ਸਾਨੂੰ ਜਿਹੜੀ ਚੀਜ਼ ਨੁਕਸਾਨ ਕਿਹੜੀ ਕਿਹੜੀ ਚੀਜ਼ ਸਾਕੋ ਨੁਕਸਾਨ ਦੇ ਐ ਇਹ ਜ਼ਿੰਦਗੀ ਜਿੱਥੇ ਜਹਾਜ਼ਾਂ ਦਾ ਖੁੱਡਮੀ ਰੋੜਾ ਐ ਜਿਹੜੀ ਉਹ ਹੀ ਹੈ। ਸਾੜੀ ਵੀ ਕਰਦੇ। ਦੇਖਾ ਪੈਗਾ ਹੋਊਗੀ। ਫੇਲ ਵੀ ਹੋ ਸਕਦੀ ਐ। ਸਫਲ ਵੀ ਹੋ ਸਕਦੀ ਐ। ਹੂੰ। ਪਰ ਆ ਕਰਦੇ। ਸੁਗਰੇ ਕਰਦੇ। ਬਸਰ ਮਾਰਦੇ ਕਰਦਾ ਹਾਂ ਥੋੜਾ ਜਿਆ। ਜਦ ਇਹ ਅੰਮ੍ਰਿਤਿਆ ਵਰਖਾ ਦੇ ਜਦ ਹੱਥ ਹੋਈ। ਕਿ ਕਿਹੜੇ ਚ ਕਰੀ ਬਈਏ। ਸਤ ਜੀ ਭਗਤ ਜਨਾ ਕੀ ਵਰਤਨ ਨਾਮ ਸੰਤ ਜਨਾ ਕੇ ਭਗਤ ਜਨ ਦਾ ਵਰਤਨ ਨਾ ਬੋਲਣ ਵਾਲੇ ਸੰਤ ਜਨਾ ਕੇ ਵਰਤਨ ਦੇ ਕੀ ਸ਼ਕਤ ਉਹ ਪਾਈ ਕਰਨ ਲੱਗ ਜਿਓ ਜਿਉਂ ਜੇ ਤੁਸੀਂ ਤ੍ਰਿਸ਼ਨਾ बुझाਉਣ ਬਾਅਦ ਤੇ ਵੀ ਜਾਂ ਭਾਈਆ ਫੋੜਨਾ ਪੈਦਾ ਉਹ ਕੰਮ ਲਿਏ ਇਹ ਪੈਸੇ ਕਿਧਰੋਂ ਕਿਧਰ ਆਪਾਂ ਕਰੀਏ ਜਿਗਾਦ ਫੇਟਾ ਉੱਡੇ ਨਾ ਬੈਗੇ ਉਹ ਬੰਦ ਕਰੋ ਉਹ ਬੰਦ ਕਰੋ ਜਿਗਾਦ ਬਣਾਓ ਆਹ ਰਿਆ ਜੋ ਰਹਿੰਦਾ ਬੰਦੇ ਗੱਲ ਦੋ ਉੱਥੇ ਰਹਿਣ ਦੇ ਅੱਤੇ ਬਣ ਜੇ ਪਾਣਾ ਹੋਵੇ ਨਾ ਜਿਹੜਾ ਕਹਿੰਦਾ ਇਹ ਬੜਜਾ ਉਹ ਬੜਜਾ ਜਿਹੜੀ ਕਹਿੰਦਾ ਇਹ ਤੇ ਹੋਣਾ ਨਹੀਂ ਫਸੇ ਕਰ ਬੜਜਾ ਜਿਗਾਦ ਤਾਂ ਮਾਰ ਜੇ ਸੁਣ ਕੇ ਵੀ ਸੁਰੂ ਦੇ ਨਾ ਦਬਾਟ ਸਰਕਾਰ ਦਾ ਨਾਮ ਦਾਸ ਓਟ ਹਰ ਕੀ ਦਾਸ ਓਟ ਹਰ ਕੇ ਨਾਮ ਉਧਰੇ ਜਾਣ ਕੋਟ ਉਹ ਤ੍ਰਿਸ਼ਰਾਂ ਤੇ ਓਟ ਦੁਸ਼ਮਣ ਤੋਂ ਹੀ ਆਜੋ ਇਸ ਨਾਮ ਦਾਸ ਦੀ ਓਟ ਹਰ ਕੇ ਨਾਮ ਉਧਰੇ ਜਾਣ ਕੋਟ ਇਹ ਇਹੇ ਉੱਧ ਰਖੇ ਫੇ ਫੇਦੀ ਤੇ ਫੇ ਕਿਹਦੇ ਨਾਲ ਰਹੀ ਹੈਗਾ ਇਹ ਕਰੋੜਾਂ ਨੂੰ ਉਧਰ ਗਏ ਜਿਨ੍ਹਾਂ ਨੇ ਉਹ ਉਹ ਭਏ ਉਹਨਾਂ ਨਿਕਲ ਗਏ ਤੁਸੀਂ ਸ਼ਬਦਾਂ ਦੇ ਵਿੱਚੋਂ ਹੀ ਬਚਦੇ ਤੁਸੀਂ ਉਹ ਕੋਈ ਬਿਜਲ ਬਚ ਕੇ ਨਿਕਲ ਹੋਊਗਾ ਜਿਹਨੇ ਨਿਕਲਣਾ ਪਿੱਛੇ ਹੀ ਨਿਕਲਣਾ ਜਿਹੜਾ ਰਹਿਣਾ ਉਹਨੇ ਪਿੱਛੇ ਰਹਿ ਜਾਣਾ ਸਤਿ ਦਿਨ ਰਾਤ ਹਰ ਹਰ ਆਪਾ ਸਾਧ ਕਮਾਲ ਹਰ ਸੰਤ ਦੇ ਨਾਲ ਇਸ ਕਰਕੇ ਹਰਦਾ ਹਰ ਆਪਾ ਸਾਧ ਕਮਾਲ ਇਹੀ ਹਰ ਹਰ ਉਹ ਬਗ ਨਾਮ ਇਹਦਾ ਵੀ ਹਰ ਹਰ ਆਪਾ ਸਾਧ ਨਾਮ ਉਹ ਦੇਖਉਂਦੇ ਇਹ ਰੱਖਦੇ ਜੀ ਖੋ ਗਿਆ ਨਾ ਬਰਤਲਾ ਨਾ ਜਿਹੜੀ ਕੀ ਹਰ ਵਕਤ ਲੋੜ ਹੂੰ ਬਰਤਨ ਦੇ ਕੁ ਮੈਦੇ ਜੈ ਉਹ ਬਰ ਜੇ ਉਹ ਉਡੀ ਖਾਲੀ ਹੁੰਦੇ ਜਨ ਕੇ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਤੀਨੋਂ ਦਾ ਹਰ ਜਨ ਕੇ ਜਿਹੜੇ ਹਰ ਕੇ ਉਹਨਾਂ ਦੇ ਖਜਾਨੇ ਕੀ ਹੁੰਦਾ ਆ ਨਾਮ ਲੈ ਬਾਕੀ ਜਿਹੜੀ ਚੀਜ਼ ਹੁੰਦੀ ਹੈ ਜੱਗ ਬਾਦ ਜੀ ਵੀ ਅਗਾ ਧੋਲ ਲੋ ਜੇ ਕੋਈ ਜੇ ਟਪਟਾ ਹੋਊਗਾ ਕੋਈ ਹੋਤੀ ਹੋਊਗਾ ਜੀ ਜਾਂ ਕੇ ਬਾਹਰ ਫੜਦਾ ਜੇ ਉਹ ਹੈ ਨਾ ਤੋ ਹਾਂ ਫਾਰ ਬ੍ਰਹਮਜਨ ਕੀਨੋ ਦਾਮ ਫਾਰ ਬ੍ਰਹਮ ਨੇ ਦਾਣ ਕੀਤਾ ਹੈ ਜਦੂ ਪਰ ਬੜੇ ਬੜੇ ਨਾਮ ਕੀਤੇ ਰਵ ਇਹ ਕਰਕੇ ਉਖ ਜਾਣਾ ਉਸ ਨਾਮ ਲਈ ਅਗਰ ਵਾਰ ਬਈ ਪਰ ਲਾ ਪਾ ਮਨ ਤਾਂ ਰੰਗ ਰਤੇ ਰੰਗ ਇੱਕੇ ਜਿਰਾਕਾਰ ਤੇ ਉਹ ਦਿਖਾ ਦੇ ਦਾ ਨਿਆਕਾਰ ਦਈਆ ਉਫਰੂ ਗੰਦੀ ਕਬ ਉਹ ਗਾਂਹ ਹੋ ਜਾਣਾ ਖਾਣੀ हो रही है खजाना भी हो रही है पत्ले में कोई मन तने रंगी रंग रत्ते रंग एके नानक जन के विती वे वेचे मानव तान हरदार मान दोए रंग एको रं सत्य मान तने रंगी रत्ते रंग मान बोटे दोए कोरण के रजे नारद जन के विती वे वेके नानक जन के विती वे विती है सुती है वो बवे ਦੇ ਵਿੱਚ ਉਹ ਕਿਤਨੇ ਵਿਚਾਰ ਉਹਦੇ ਵਿੱਚ ਕੋਈ ਵਿਚਾਰ ਜਿਹਾ ਹਰ ਕੋਈ ਬਿਲਕੁਲ ਤਾਂ ਫਰਕ ਇੱਕਦੇ ਆਲੇ ਦੇ ਵਿਗੁੱਤ ਵਿਚਾਰ ਕਿਸਮਾ ਹਾਂਜੀ ਅਸਰ ਦੇ ਵਿਚਾਰ ਕੋਈ ਨਹੀਂ ਦੇਖੋ ਉਹ ਤਾਂ ਬਰੋਡ ਹੈ ਡਿਫਰੈਂਸ ਹੈ ਮਾੜੀ ਕੋਈ ਵਿਚਾਰ ਜਦ ਇੱਕ ਇਕਲੇ ਆਲੇ ਕੋਈ ਦੱਡ ਸਿਰ ਦਬੇਦਨੀ ਜਦ ਤੋਂ ਹੁੰਦਾ ਪਿੰਡ ਬੇਦ ਜਦ ਬੇ ਕੋਈ